ਪਗੋਤੀ ਭਗਵੰਤ ਭੱਤੀ ਘਰਾਂ ਉਹ ਪਗੋਤੀ ਭਗਵੰਤ ਭੱਤੀ ਘਰਾਂ ਪਗੋਤੀ ਕੌਣ ਨੇ ਅੱਗੇ ਆ ਗਿਆ ਵੈਸੇ ਤੋਂ ਅੱਗੇ ਪਹੋਤੀ ਐ ਉਹ ਪਗੋਤੀ ਕੌਣ ਨੇ ਜੇ ਆਪਾਂ ਭਗਤ ਜਿਹੜੇ ਸੀ ਇਸੇ ਨੇ ਲੱਭ ਪਹੋਤੀ ਵਸਦੇ ਪਗੋਤੀ ਤਲਵਾਰ ਲੂਡੀ ਕਹਿੰਦੇ ਜਾਦੂ ਕਹਿੰਦੇ ਨਾ ਤ੍ਰਿਆ ਤ੍ਰਿਆ ਨੂੰ ਪਗੋਤੀ ਕਹਿੰਦੇ ਨੇ ਇਹ ਤੇਰੀਆ ਉਹ ਕੰਤਗਾਰ ਹੈ ਇਹ ਤੇਰੀਆ ਭਗੌਤੀ ਆ ਫਿਰ ਇਹ ਤੇ ਜਿੱਦ ਲੈ ਖੜਾਊਗਾ ਤੇ ਚਾਹ ਤੇ ਗੁਰੂੁਬਖੀ ਕਿਹਾ ਗੁਰੂੁਬਖੀ ਵੀ ਉਹੀ ਜੀ ਭਗੌਤੀ ਹੋ ਆ ਇਹ ਭਗੌਤੀ ਆ ਭਗਤਪ੍ਰਿੰਕਾ ਲਫਜ਼ ਇੱਕ ਮੇਰੇ ਹਿਰਦੇ ਬਸਾ ਇਹ ਆ ਭਗੌਤੀ ਆ ਜਿਹੜਾ ਤੋ ਵੇਗ ਬੁੱਧੀ ਭਉਦੀ ਆ ਵੇਗ ਜਿਹੜਾ ਭਗਤ ਹੈ। ਉਹ ਵੇਗ ਭਗਤ ਹੈ ਆਪ ਉਹਦੀ ਬੁੱਧ ਭਉਦੀ ਹੈ। ਵੇਗ ਬੁੱਧੀ। ਜੋ ਕੰਮ ਕਰਨਾ ਉਹ ਵੇਗ ਬੁੱਧੀ ਨੇ ਕਰਨਾ ਹੈ ਬਾਤ ਅਲਾਬ ਵੇਗ ਨਹੀਂ ਕਰਨਾ। ਜਾਂਦਾ ਆਦਾਨ ਪਰਦਾਨ ਬੁੱਧ ਦੇ ਬੁੱਧ ਨੇ ਕਰਨਾ ਵੇਗ ਨਹੀਂ ਕਰਨਾ। ਵੇਗ ਤਾਂ ਚੁੱਪ ਉਹਦਾ ਬੋਲਣਾ ਨਹੀਂ ਜਾਣਦਾ ਮੈਂ ਆਪੋ ਬੋਲਣਾ ਜਾਣਦਾ। ਤੋ ਬੋਰਨ ਜਾਣਦਾ ਨਹੀਂ ਗੱਲ ਬੰਦਾ ਹੀ ਬੱਤੀ ਜਿਹੜੀ ਹੈਗੀ ਹੈ ਨਾਮ ਕਿਹਾ ਬੱਤੀ ਕੱਲ ਬਾਅਦ ਜਿਹੜੀ ਹੈ ਉਹ ਬੁੱਢੀ ਦੇ ਦਰ ਵਸਤੇ ਹੋਣੀ ਕੱਲ ਬਾਅਦ ਸ਼ੁਰੂ ਹੁੰਦੀ ਹੈ ਉਹ ਨੂੰ ਬੁੱਢੀ ਕਹਿੰਦੇ ਕੌਣ ਭਗਤ ਕੋਡੋ ਅੰਤ ਭਗਤੀ ਕਰ। ਭਗਵੰਤ ਬਵੇਕ ਹੈ ਭਗੋਤੀ ਬਵੇਕ ਬੁੱਧੀ ਹੈ। ਦੋ ਹੈ ਕੋਈ। ਭੋਤੀ ਕੋਲੋ। ਭਗਵੰਤ ਭਗਵੰਤ ਭਗਤੀ ਕਰੋ। ਭਗਵੰਤਰ ਭਗੋਤੀ ਦੋਨੀਆਂ ਪਿਤਾ ਮਾਤਾ ਦੋਨੀਆਂ। ਭਗੋਤੀ ਹੀ ਭਗਵੰਤ ਹੈ ਭਗਵੰਤ ਹੀ ਭਗੋਤੀ ਹੈ। ਕੋਈ ਨਹੀਂ। ਦੋਲੀ। ਹਾਂ। ਭਗਵਾਨ ਸੇ ਜਾਣ ਉਹ ਕੋਈ ਗੱਲ ਨਾ ਆਪਣੇ ਮੋਢੋਂ ਨਾ ਆਉਂਦਾ ਆਪਣੇ ਮੋਢੋਂ ਸਾਚੇ ਨੂੰ ਆਉਂਦਾ ਭਗਤੀ ਦਾ ਰੰਗ ਭਗਤੀ ਦਾ ਰੰਗ ਜੜ ਕੇ ਬਣਦੀ ਹੈ ਭਗਵਾਨ ਤੀਵੀਂ ਭਗਤੀ ਦਾ ਰੰਗ ਜੜ ਕੇ ਭਗੋਤੀ ਬਣਦੀ ਹੈ ਜਿਹੜਾ ਭਗਵਤ ਦੀ ਭਗਤੀ ਆ ਉਹਦੇ ਜਿਹੜੀ ਪਾਣ ਜਾਂ ਚੜਦੀ ਇਹਨਾਂ ਪਾਣ ਛੇਰ ਬਬੇ ਬੁੱਧੀ ਬਣਦੀ ਆ ਫਿਰ ਇਹਦੀ ਧਾਰ ਦੀ ਵਹਿਦੀ ਸਾਬਰ ਨੂੰ ਵੱੜਦੀ ਚਲੀ ਜਾਂਦੀ ਹੈ। ਅਚਿੰਮਨ ਵੀ ਇਹਨੇ ਸੇਣਾ। ਹਾਂਜੀ ਹਾਂ। ਅੰਦਰ ਸਿੰਗਰ ਸਾਬਦ ਹੈ। ਇਹਦੇ ਜੁਣਾ ਵਿਵੇਦ ਹੋਵੇ। ਹਾਂਜੀ। ਸਗਲ ਤੇ ਅਗੇ ਦੁਸ਼ਟ ਦਾ ਸੰਗ। ਸਗਲ त्यागे ਦੁਸ਼ਟ ਦਾ ਦੁਸ਼ਟ ਕਾ ਮੈਂ। ਬਿੱਦਕ ਦੁਸ਼ਟ ਹੈ। ਜੋ ਬਰਾਬਰ ਤਲਾਲ ਖੜੇ ਨੇ ਸੱਚ ਦੇ ਉਸ ਵੇਲੇ ਭਜਨੀ ਦੇ ਉਲਟ ਪ੍ਰਚਾਰ ਕਰਨ ਵਾਲੇ ਉਹਦਾ ਬਿਲਕੁਲ ਟੁੱਟ ਨਹੀਂ ਸੰਤ ਸਿਆਗ ਦਵੇ ਤਾਂ ਭੁਲਤੀ ਪਰ ਤੂਗਾ ਤਾਂ ਗੁਰਮਖ ਬੜੂਗਾ ਨਹੀਂ ਬੜੀ ਜਿਹੜਾ ਦੋਆ ਨਾਲ ਵੀ ਸੰਪਰਕ ਰੱਖਦਾ ਹੈ ਇੱਧਰ ਵੀ ਆ ਜਾਂਦਾ ਹੈ ਉਹ ਸੋ ਪ੍ਰਭੂ ਉਹ ਸਿਆ ਲਈ ਉਹ ਸਾਜੂ ਗ੍ਰਉ ਸਗਲ ਤੇ ਅੱਗੇ ਦੁਸ਼ਟਾ ਸਰਦੂ ਦੁਸ਼ਟ ਲਭਦੇ ਵਾਸਤੇ ਅਸੀਂ ਕਿੰ ਕਾਹਨੇ ਸਾਖਤ ਦੁਸ਼ਟ ਜਿਨ ਮਾਇਂ ਬਿਰਾਜ ਜਿਹੜੇ ਦਿੱਤਕ ਸੀ ਗੁਰੂ ਘਰ ਦੇ ਦਿੱਤਕ ਉਹ ਸਾਖਤ ਸਾਖਤ ਕਹਿੰਦਾ ਮੈਂ ਕਰਦਾ ਹਾ ਤਰਤਾਂ ਸਾਥੋ ਜੀ ਸਾਥ ਸੁਣਨਾ ਕੀ ਜੀ ਦੂਰ ਹੋ ਜਾਈਏ ਬਾਗ ਇਹ ਨਾ ਬਾਤ ਆ ਐਸਨ ਤੇ ਜਿਹੜੇ ਸਾਥੇ ਕੁਝ ਜਾਨਦਨ ਕੋਲ ਦੀ ਕੁਝ ਤਾਂ ਜੀ ਰਾਮ ਰਹੀਏ ਸੀ ਮਨਸਾੜੀ ਪਰ ਉਹ ਰਾਮ ਰਹੀਏ ਤਾਂ ਪੰਜ ਪਾਛੇ ਦੇ ਬਾਦ ਚਾਏ ਕੁਝ ਕਦ ਬੀਸੀ ਉਹ ਤਾਂ ਉਹ ਸ੍ਰੀ ਕਾਂਤ ਕਬੀ ਸੀ ਸਾਰੇ ਇਹੀ ਜਿਹੜੇ ਬਰੋਜ਼ ਕਰਦੇ ਸੀ ਘਰ ਤੋਂ ਇਸਾਕਲ ਸੀ ਮਨਤੇ ਬਿਰਸ਼ੇ सगला ਜਾਨੀ ਜਦ ਇਕੱਠੇ ਹੋਏ ਨੇ ਨਾ ਆਪਸ ਸਾਰੀ ਉਹਦੇ ਆ ਗੱਲ ਛੜਤੀ ਜਾਣੀ ਜਿਹੜੀ ਆਪਾਂ ਹੁਣ ਕਹਿਣ ਲੱਗੇ ਆ ਉਹ ਜਿਆਦਾ ਸੀ ਉਹਨਾਂ ਨੇ ਅਰਥਾਂ ਨੇ ਅਰਥ ਉਡ ਸਿੱਤੀ ਸੂਈ ਉੱਥੇ ਜਿਵੇਂ ਗੁਰੂਆਂ ਨੇ ਕੀਤੀ ਸੀ ਸੂਈ ਉੱਥੇ ਸੂਈ ਕਰਨੀ ਪਊ ਤਾਂ ਇਹ ਛਾਂਟਣਗੇ ਇਹ ਜੋ ਗੁਰੂ ਵਾਲੇ ਅੱਡ ਹੋ ਜਾਣਗੇ ਜਿਹੜੇ ਦੁਆਏ ਨੇ ਪਥੀਏ ਆਰਾਮ ਲਈਏ ਪੀਰਾਂ ਦੀ ਸਾਡ ਅੱਡ ਹੋ ਜਾ। ਖੜ ਸਾਧੂ ਕੀ ਮਤਲਬ? ਇਹ ਉਹਨਾਂ ਦੀ ਸੰਗਤ ਪਿੱਛੇ ਹੀ ਗਾਵਾਂ ਨੇ ਨਹੀਂ ਗਾਵਾਂ ਨੇ ਰਹਿਣ ਸਾਧੂ ਕੀ ਮਤਲਬ? ਗੁਰੂ ਵਾਲੇ ਬਹੁਤ ਅੱਡ ਗਾਵੀਦੇ। ਇਹ ਤਾਂ ਸਾਖਤ ਦੇ ਨਾਲ ਦੇ ਵੱਢ ਨਹੀਂ ਗੁਰੂ ਵਾਲੇ ਵੱਢੀ। ਨਿਕਬਸੇ ਆ ਜਾਓ ਜਾਂ ਇੱਧਰ ਆ ਜਾਓ ਉੱਧਰ ਆ ਜਾਓ। ਖੜੇ ਹੀ ਸੀ ਜਦੋਂ ਗੁਰੂ ਸਾਹਿਬ ਦੇ ਜੀ ਖੜੇ ਹੁਣ ਵੀ ਖੜੇ ਹੁੰਦੇ ਸੀ। ਯਾਤਗੁਰੂ ਕੀ ਬੁੱਢਣਗੇ ਜੋ ਅਰਥ ਨੂੰ ਇਹ ਜੇ ਦੇਖੋ ਜਾਣਦੇ ਨੇ ਸਾਰੇ ਅਰਥ ਨੂੰ ਜਿਹੜੇ ਦੂਏ ਕਰਦੇ ਜੂਤ ਜੇ ਦੂਏ ਦੱਸਦੇ ਨੇ ਗੋਲ ਕੇ ਪਿੱਛੇ ਤਲਵਾਰਾਂ ਵੀ ਉਹਨਾਂ ਦੀਆਂ ਚਲਦੀਆਂ ਨੇ ਤਲਵਾਰਾਂ ਹੀ ਉਹ ਚਲਦੀਆਂ ਨੇ ਸਭ ਚਿੱਤੀ ਦੁੱਗੀ ਹੋ ਚੁੱਕੀ ਗੱਲ ਸਾਰੀ ਉਹ ਕੁਛ ਵੀਰ ਹੋ ਗਿਆ ਕਹੇ ਦੁਨੀਆ ਸੂਤੂ ਕਰਦੀ ਹੈ ਜਿਹੜਾ ਨਾ ਡਰਾਮਾ ਕੀ ਕਰਦਾ ਕੱਲੇ ਬਚੇ ਕੀਤਾ ਲੋਰਾਂ ਬੋਲ ਲੱਗਿਆ ਵੀ ਉਹ ਕੋਈ ਤੁਸੀਂ ਪਿਛਤ ਤੇ ਗਏ ਹੋ ਆਪਸ ਵਿੱਚ ਲੜਾਈ ਕਿਹੜੀ ਗਲਤੀ ਕਰਦੇ ਜੋ ਆ ਸਭ ਪਖੰਡਾ ਹੈ ਸਭ ਅੱਖ ਗੋਲ ਕਰਤੇ ਆ ਸਾਰਿਆਂ ਦੀ ਗੱਲਾਂ ਹੋਰ ਨੇ ਉਸ ਗੋਲ ਕਰਤੇ ਯਾ ਚੌਧਰ ਤੇ ਚੌਧਰ ਦੇ ਵਿੱਚ ਗੋਲਕ ਦੀ ਚੌਧਰ ਜਿਹਦੇ ਕੋ ਇਹ ਦੇਖੋ ਚੌਧਰ ਆ ਜੀ ਉਹਦੀ ਉਹ ਗੋਲਕਾ ਹੋਰ ਬੋਲਦੀ ਜੀ ਚੌਧਰ ਆ ਜੀ ਹੋਈ ਜਾਂਦਾ ਤਾਂ ਕੁੱਪੇ ਟਿੱਪ ਰੰਗ ਸ਼ਗਲ ਤੇ ਅੱਗੇ ਜਿਹਨੂੰ ਗੁਰਮਤ ਦਾ ਰੰਗ ਚੜਦਾ ਹੈ ਉਹ ਹੈ ਪਾਣ ਹੈ ਬਹੁਤੀ ਹੋਅ ਪਾਣੀ ਜੜੀ ਬਹੁਤੀ ਹਾਂ ਮੰਨਦੇ ਬਿਨਸ਼ੇ ਸ਼ਗਲਾ ਭਰਮ ਉਹਦੇ ਮੰਤੋਂ ਸਾਰਾ ਹੀ ਭਰਮ ਦੂਰ ਹੋ ਜਾਂਦਾ ਕੋਈ ਭਰਮ ਰਹਿੰਦਾ ਕੋਈ ਭਰਮ ਰਹਿੰਦਾ ਉਹਨੂੰ ਨਹੀਂ ਇਹ ਭਰਮ ਇਹ ਰਣ ਗੁਰੂ ਹੈ ਉਹਨੂੰ ਇਹ ਭਰਮ ਨਾਨਕ ਦਾਸ ਨਹੀਂ ਹੈ ਨਾਨਕ ਦਾਸ ਹੈ ਦਾਸ ਨੂੰ ਮੈਂ ਬੜਿਆ ਹੀ ਮਰਦਿਆ ਦੂਰ ਨੂੰ ਮਰਦਿਆ ਦੀਏ ਤੇ ਉਹਨੋਂ ਇਹ ਭਰਮ ਨਹੀਂ ਹੈ ਕੋਈ ਪਤਾ ਇਸ ਗੱਲ ਤੋਂ ਆਤਮਾ ਗੁਰੂ ਮੰਨਣਾ ਹੈ ਤਾਂ ਸੱਤਿਆਨਾਸ ਹੋ ਚੁੱਕਿਆ ਸਭ ਕੁਝ ਆਇਆ ਹੋਇਆ ਜਿਆ ਆਇਆ ਰੱਬ ਦਾ ਬੋਝ ਹੈ ਤਲਵਾਰਾਂ ਕਰ ਰਹੀ ਹੈ ਇਹ ਸਭ ਰੀਪੋਰਟ ਹੋ ਰੂ। ਹਾਂ ਕਰ ਪੂਜੇ ਸਗਲ ਪਾਰ ਬ੍ਰਹਮ ਕਰ ਪੂਜੇ ਸਗਲ ਪਾਰ ਬ੍ਰਹਮ ਪੂਜੇ ਸਗਲ ਪਾਰ ਬ੍ਰਹਮ ਹਾਂ ਸਗਲ ਜਿਹੜਾ ਹੈ ਜੋ ਵੀ ਸਦੀ ਸਾਰੀ ਹੈ ਇਹ ਪਰਮਨੂ ਪਤਾਈ ਰੂਪ ਹੈ ਉਹਦੇ ਪਿੱਛੇ ਹੀ परों कोई चीज नहीं है ब्रह्म है मनके मनके मनके मनके, मनके।, मनके ही सारा जो है ये विश्व संसार जैसे तू देखदा हर रूप है ये रूप है संसार की दा कीदा पैदा कीता ही रूप है ਉਹਨੇ ਜਿਹੜਾ ਜਿੱਤਰੇ ਅਵਾਸ ਤਾਂ ਚਿੱਤ ਦੇ ਪਿੱਛੇ ਕੌਣ ਖੜਾ ਹੈ ਜਿਹੜਾ ਚਿੱਤ ਰੱਬ ਦੇਖ ਰਿਹਾ ਹੁੰਦਾ ਸਭ ਕੁ ਬਣਿਆ ਹੋਇਆ ਨਕਸ਼ਾ ਇਹਦੇ ਪਿੱਛੇ ਕੌਣ ਹੈ ਬਾਰਬ੍ਰਮ ਦੇ ਪਿੱਛੇ ਇਹਨੂੰ ਸਾਰੇ ਨੂੰ ਬਾਰਬ੍ਰਮ ਮੰਨ ਗਈ ਇਹ ਸਾਰਾ ਹੀ ਬਾਰਬ੍ਰਮ ਹੈ ਇਹ ਦਰਸ਼ਨ ਕਰਨਾ ਤਾਂ ਸਭ ਕੋ ਬਾਰਬ੍ਰਮ ਹੀ ਚੋਦੀ ਹੈ ਇਹ ਰਛਨਾ ਬਾਰਬ੍ਰਮ ਦੀ ਲੀਲਾ ਸਾਧ ਸੰਗੀ ਪਾਪਾ ਮਲ ਖੋਵੇ ਸਾਧ ਸੰਗੀ ਪਾਪਾ ਤੁਲ ਖੋਵੇ ਆਪਣੇ ਤੋਂ ਦੂਰ ਸਾਧ ਕੇ ਸੰਗੀ ਮਨ ਕੁਤੀਦਾ ਉਹਨੂੰ ਸਾਧ ਲਵੇ ਜਿਹੜੇ ਹੁਕਮ ਦਾ ਵਿਰੋਧ ਕਰਦਾ ਪਾਪ ਕਰਦਾ ਦੂਏ ਦਾ ਚੈਤ ਬਦਾ ਗੁਰਾ ਇਹ ਮਾਇਆ ਲੈ ਜਿਹੜੀ ਅੰਦਰ ਇਹਨੂੰ ਖੋਦ ਲੇ ਇਸੇ ਮਨ ਲਾਗਵੇ ਪਾਪਾ ਮਨ ਖੋਵੇ ਜੇ ਸੁਪਕੋਤੀ ਕੀ ਮਤ ਉੱਤਮ ਹੋਵੇ ਤਾਂ ਤੇ ਸੁਪਕੋਤੀ ਕੀ ਮਤ ਉੱਤਮ ਜਿਆਦਾ ਬਿਹੜ ਫਿਰ ਮਤ ਉੱਤਮ ਨਹੀਂ ਸਾਡੇ ਦਾ ਅੰਦਰ ਨਾਲ ਹੀ ਹੈ ਅਈ ਬ ਰੱਬੀਓ ਜੀ ਤਾਂ ਮਾਰਾ ਤੇ ਸੁਪਕੋਤੀ ਕੀ ਮੱਤ ਉੱਤਮ ਹੋਵੇ ਸਾਡੇ ਮੱਤ ਦਾ ਕੋਈ ਸੁਣ ਨਹੀਂ ਚਾਹੁੰਦਾ ਸਾਡੇ ਮੱਤ ਦਾ ਲੋਕ ਨਫਰਤ ਕਰਦੇ ਏ की ਧਿੰਕ है ਮੱਤਾ ਹੈ है। ਮੱਤਾ ਹੈ लोग ਤਾਂ करते ਨਭਤ ਕਿਉਂ ਕਰਦੇ ਅਸੀਂ ਇਹ ਨਹੀਂ ਲਈ ਜੋ ਲਈ ਜਮੀਰਾ ਪ੍ਰਚਾਰ ਕਰਦੇ ਆ ਭਗਤੀ ਦੀ ਮਤ ਨਹੀਂ ਜੋ ਪ੍ਰਚਾਰ ਹੋ ਗਿਆ ਕੁਝ ਹੋ ਰਿਹਾ ਉਹ ਤਾਂ ਬਗਾਨੇ ਜਿਹੜਾ ਰੂਪ ਅਸੀਂ ਇਤਨੀ ਨਹੀਂ ਸੀ ਦੇਖਣਾ ਉਹ ਅਸੀਂ ਉਹਨੂੰ ਉਹਦੀ ਪੂਜਾ ਕਰਦੇ ਉਹਨੂੰ ਮੰਨਦੇ ਉਹਦਾ ਪ੍ਰਚਾਰ ਕਰਦੇ ਹਾਂ ਜਿਹੜੇ ਰੂਪ ਨੂੰ ਵਿਆਹ ਸੀ ਅੱਖੀਂ ਦੇਖਣਾ ਨਹੀਂ ਪਰਤਿਆ ਦਾ ਰੂਪ ਉਹਦਾ ਤਾਂ ਅਸੀਂ ਪ੍ਰਚਾਰ ਕਰਦੇ ਹਾਂ ਤੇ ਜੇਕਰ ਬਲ ਨਹੀਂ ਚੱਲਦੀ ਉਹਦੀ ਜਲਣਾ ਉੱਥੇ ਲੋਹੇ ਦੀਆਂ ਹੀ ਕਰਪਾ ਨਾਲ ਚੱਲਣੀਆਂ ਸਿੱਧੇ ਭਗੋਤੇ ਨਹੀਂ ਚੱਲਣੀਆਂ ਉੱਥੇ ਆ ਭਗੋਤੀ ਜਨੂਈ ਲੋਹੇ ਦੀ ਜਾਨ ਖੜਕਦਾ ਚੱਲਦੀ ਨਹੀਂ ਉੱਥੇ ਜਾਨ ਖੜਕ ਨਹੀਂ ਉੱਥੇ ਚੱਲਣੀ ਜੇ ਜਾਨ ਖੜ ਗਿਆ ਉੱਥੇ ਲੋਹੇ ਦੀ ਦਰਵਾਜ਼ਾ ਚੱਲਦੀ ਸੀ ਫਿਰ ਨਹੀਂ ਅਕਾਲ ਤੱਕ ਦਲੀ ਜਲੋਰ ਕਿਤੇ ਕਿਤੇ ਉਹ ਇੱਥੇ ਦਾ ਰਾਜ ਹੈ ਰਾਜਵਾਲਾ ਜਿਹੜਾ ਕਬਜ਼ਾ ਹੋ ਗਿਆ ਜੀ ਤਲਵਾਰ ਹੈ ਹੋਰ ਬਣਾ ਲਓ ਜੇ ਮੇਰੇ ਬਾਸ਼ਾਲਾ ਤਲਵਾਰ ਦੇਖੋ ਦੋਨ ਅੱਜਨ ਤਲਵਾਰਾਂ ਹੈ ਪੱਛੜ ਗਏ ਕੀ ਮਤ ਉੱਤਮ ਹੋ ਉਹ ਭਗੌਤੀ ਹੈ ਉਹਦੀ ਮਤ ਉੱਤਮ ਜੋ ਜਾਨ ਘੜ ਕੇ ਨਾਲ ਲੜਦਾ ਹੈ ਜਿਹੜਾ ਆਪੇ ਭਗਤੀ ਹੈ ਆਪੇ ਭਗਤਾ ਹੈ ਭਗਵੰਤ ਦਾ ਰੰਗ ਚੜਿਆ ਹੋਇਆ ਹੈ ਉਹ ਗਵੰਤ ਵੀ ਆਪੇ ਹੈ ਭਗੋਤੀ ਵੀ ਆਪੇ ਹੈ ਕੋ ਕਰੇ ਨਿਤ ਨੀਤ ਤਹਿਲ ਭਗਵੰਤ ਦੀ ਭਗਵੰਤ ਦੀ ਆ ਚੱਲੇ ਉਹ ਹੈ ਜੜਾ ਉਹ ਦਾ ਸੱਚਾ ਵਰਤ ਬਵੇਗ ਦੀ ਸੇਵਾ ਕਰ। ਬਵੇਗ ਬਵੇਗ ਦੌੜਾ ਦੁਨੀਆ ਦੀ ਬੁੱਧ ਬਵੇਗ ਹੋ। ਕੋੜਾ ਬੁੱਧਤਾ ਦੁਨੀਆ ਕੋ ਹੈ। ਬੁੱਧੀ ਸਭ ਕੋ ਦਾ ਹੈ। ਲੋੜ ਕੀ ਦੀ ਹੈ ਬਵੇਗ ਦੀ ਲੋੜ ਹੈ ਬਵੇਗ ਬੁੱਧੀ ਦੀ ਲੋੜ ਨਹੀਂ ਹੈ। ਬੁੱਧੀ ਦਾ ਹੈ ਲੈ ਕੋ। ਬਵੇਗ ਦੀ ਲੋੜ ਹੈ। ਬਵੇਗ ਦੀ ਲੋੜ ਹੈ। ਤੇ ਬਵੇਗ ਨਹੀਂ ਸੇਵਾ ਕਰਨੀ ਹੈ। ਕਹਿਲ ਕੀ ਕਹਿੰਦੀ ਆ ਤਾਂ ਵੇਖਦੀ ਬੁੱਧ ਨੂੰ ਧੀਜਾ ਬੁੱਤ ਸੁਬਿਕਾ ਕਹਣਾ ਵਰੀ ਬੁੱਧ ਨੂੰ ਵੇਖ ਦੇ ਦੇ ਬੁੱਧ ਦਾ ਪਹਿਲਾ ਇੱਥੇ ਬੁੱਧ ਵਜਤ ਨਹੀਂ ਉਹਨਾਂ ਬੇਖਣਾ ਥੋੜਾ ਜਿਹਾ ਫਰਕ ਟੈਂਪਰ ਦੇ ਦੀਏ ਬੁੱਧ ਨੂੰ ਤਾਂ ਵੇਖਦੀ ਉਹ ਤਾਂ ਹੈਗੀ ਆ ਤੇ ਕੀ ਕਰੇ ਟੈਂਪਰ ਕੋਈ ਹੋਰ ਚੀਜ਼ ਨਹੀਂ ਦੇਦੀ ਮਾਇਆ ਹੀ ਦੇਦੀ ਉਹ ਦੀ ਰੇਤੀ ਉਹ ਕਹਨਾਂ ਮੈਂ ਬੈਸਨੂ ਬਾਨੀ ਆਪੀ ਕੰਟੀਏਗੇ ਮਾਨਤਨ ਅਰਪੇ ਬੈਸਨਪ੍ਰੀਤ ਮਾਨਤਨ ਅਰਪੇ ਬੈਸਨਪ੍ਰੀਤ ਮਨ ਕਰਕੇ ਹਿਰਦੇ ਕਰਕੇ ਕਿਸਨ ਮਾਇਆ ਤੋਂ ਅਲੱਗ ਜਿਹੜੀ ਲਿਪਤ ਨੇ ਹਉਮੈਜ ਨੂੰ ਬਸਮਜਣਾ ਹੈ ਲਿਪਤ ਸਰ ਜੀ ਇਹ ਨਿਬੜਦੀ ਨਹੀਂ ਹਾਂ ਜਿਹਦੇ ਅੰਦਰ ਮਾਇਆ ਦੀ ਲਪਤਾ ਲਵੇੜ ਨਹੀਂ ਆਉਂਦੀ ਮਾਇਆ ਦਾ ਰੰਗ ਨਹੀਂ ਚੜਦਾ ਮਾਇਆ ਦਾ ਪ੍ਰਭਾਵ ਦੂ ਪੈਂਦਾ ਮਾਇਆ ਦਾ ਮੋਹ ਨਹੀਂ ਹੈ ਜਿਹਦੇ ਉਹ ਮਾਇਆ ਦਾ ਮੋਹ ਹੈ ਵੀ ਜੀ ਇਹ ਤਾਂ ਮਾਇਆ ਪਿਆਰੇ ਮਾਇਆ ਦਾ ਪਾਹ ਚੜ ਗਿਆ ਤੇ ਫਿਰ ਲੋਭ ਰੰਗ ਵੀ ਚੜ ਗਿਆ ਉੱਤੇ ਜੇ ਬਿਨਸਨਾ ਮਾਇਆ ਦਾ ਪਾਣੀ ਜਿਹੜੇ ਲੋਭ ਦਾ ਰੰਗ ਨਹੀਂ ਚੜਦਾ ਆੜੇ ਪਾਏ ਬਾਹਾਰ ਕੋਰੇ ਰੰਗ ਨਸੋਏ ਜੇ ਪਾਣੀ ਝੜਿਆ ਤਾਂ ਕੋਰੇ ਨੂੰ ਰੰਗ ਨਹੀਂ ਚੜਦਾ ਹੈ ਫੇਰ ਹੀ ਚਰਨ ਹਿਰਦੇ ਪਸਾਬੇ ਚਰਨ ਹਿਰਦੇ ਪਸਾਬੇ ਹਰ ਚਰਨ ਜਿਹੜੇ ਹਰ ਕੇ ਗੋਲ ਉਹ ਪਸਾਬੇ ਹਰਦੇ ਵਿੱਚ ਨਾਨਕ ਐਸਾ ਭਗਵੰਤ ਪਰੋਤੀ ਭਗਵੰਤ ਐਸਾ ਐਪੋਕਰਤੀ ਭਗਵੰਤ ਕੋ ਆਹ ਐਸਾ ਭਗੋਤੀ ਭਰੂਤ ਕੋ ਐਸਾ ਆਇਆ ਦੇ ਨਾਲ ਆਇਆ ਭਗੰਤ ਕੋ ਪਾਵੇ ਉਹ ਭੋਤੀ ਨਾਲ ਐਸਾ ਆ ਗਿਆ ਇਸੀ ਨਹੀਂ ਆਇਆ ਹੁਣ ਐ ਨਾਲੇ ਵਿਅਕਤੀ ਬੁੱਤ ਬਵੇ ਦਾ ਦਰਦ ਆਦੀ ਹੱਥ ਵਿੱਚ ਤੇ ਤਲਵਾਰ ਬਵੇ ਇੱਕ ਬੁੱਧਾ ਬੁੱਵੇ ਕਾ ਜਿਹੜਾ ਉਹਦਾ ਬਵੇਕ ਹੈ ਉਹਦੇ ਕੋਲ ਤਲਵਾਰ ਬੁੱਧੀ ਦੀ ਬਵੇ ਕਾਲੀਆ ਤਲਵਾਰ ਵਦਨ ਦੀ ਪਹਿਲਾਂ ਧੂਈ ਸੀ ਹੁਣ ਧੂਈ ਐਸਾ ਭਗੌਤੀ ਭਗਵੰਤ ਗੋਪਾਰਾ